ਕਬੂਲ ਸਾਧ ਸੰਗਤ ਇਹ ਪਾਵਾਂ ਉਸ ਹਿਸਤਾਨ ਦੇ ਬਹਰ ਨਾ ਆਵੇ ਕਬੂਲ ਸਾਧ ਸੱਤ ਦੇ ਕਦੇ ਨੂੰ ਸਾਧ ਸਾਧਾਂ ਦੀ ਸਫਤ ਬੜ ਜਾਂਦੀ ਹੈ ਕਦਮ ਲੀਆ ਜਲ ਹੋਵੇ ਤੇ ਸਾਧ ਇਹ ਜਾਨਵਰ ਲੈਣਾ ਰਹਿਣਾ ਲੈਣਾ ਰਹਿਣਾ ਕਦੇ ਐਸਾ ਵੀ ਟਾਈਮ ਆ ਜਾਣਾ ਉਹ ਸਾਧ ਹੈ ਚਿੱਕੀ ਦਾਬ ਦੀ ਵਿਚਾਰਤਾ ਦਾ ਪਰਚਲਦ ਹੁੰਦੀ ਹੈ ਗੁਰਮਤ ਤੋਂ ਵਿਚਾਰਤਾ ਪਰਗਟ ਹੁੰਦੀ ਹੈ ਕਦੇ ਜਨਮ ਲੈਣਾ ਮਿਲ ਜਾਂਦੀ ਹੈ ਪਜਾਇਨ ਬੜ ਜਾਂਦੀ ਹੈ ਸਾਧ ਸੰਤੋ ਹਾਂ ਉਸ ਤੋਂ ਫੇਰ ਨਹੀਂ ਉਹ ਸਾਧ ਸੰਤੋ ਉਹਦਾ ਮੁੜ ਕੇ ਸਾਧ ਫੇਰ ਉਹ ਦੁਬਾਰਾ ਉਸ ਅਸਲ ਗੱਲ ਤੇ ਨਹੀਂ ਹੁੰਦਾ ਉਦੋਂ ਇੱਕ ਵਾਰ ਆਤਮ ਤਨ ਕਰਸ ਨਿਕਲਿਆ ਵਾਪਸ ਤੇ ਪੁੱਤ ਪਾਪ ਨੂੰ ਦੁਬਾਰਾ ਨਹੀਂ ਬਦਲਦਾ ਦੁਬਾਰਾ ਵੀ ਮੰਨਦਾ ਉਹ ਜੋ ਮਰਜੀ ਪੜਾਈ ਜਾਵੇ ਉਹ ਜਿਹੜੀ ਇੱਕ ਵਾਰ ਮਾਸਟਰ ਨੂੰ ਛੱਡ ਗਿਆ ਸਮਝ ਗਿਆ ਵੀ ਇਹ ਗੱਲ ਤਾਂ ਦੁਬਾਰਾ ਹੁੰਦਾ ਉਹਦਾ ਗਿਆਨ ਨਾਲ ਦੇ ਕਰਸੀ ਦੁਬਾਰਾ ਉਹਦਾ ਗਿਆਨ ਬਿਲਕੁਲ ਪਿੱਛੇ ਦੇ ਅਗਿਆਤ ਦੇ ਉਹ ਗੱਲਾਂ ਜਿਹੜੀਆਂ ਇੱਕ ਵਾਰ ਮਟਾਸੀਆਂ ਦਰੋਂ ਉਹਨੂੰ ਨਹੀਂ ਦੋ ਰਹਾ ਉਹ ਸਰ શાંતੇ ਬਹੁਤ ਨਾਲ ਅੰਦਰ ਜੇ ਅੰਦਰ ਗਿਆਨ ਦਾ ਪੂਰਾ ਪ੍ਰਕਾਸ਼ ਹੋ ਜਵੇ ਪ੍ਰਕਾਸ਼ ਹੋ ਜਵੇ ਪ੍ਰਕਾਸ਼ ਜਦੋਂ ਰਹੇ ਜੇ ਪ੍ਰਕਾਸ਼ ਹੋ ਤਾਂ ਹਨੇਰਾ ਵੀ ਕਿਦਣਕ ਤੇ ਹੋਊਗਾ ਪ੍ਰਕਾਸ਼ ਤੋਂ ਬਾਅਦ ਮੈਰਾਹ ਪ੍ਰਕਾਸ਼ ਉਹਨੂੰ ਕਹਿੰਦੇ ਨੇ ਕਿਤੇ ਕਿਤੇ ਵੀ ਨਿਹਰਾ ਨਹੀਂ ਰਹੋ ਪ੍ਰਕਾਸ਼ ਉਹ ਚੀਜ਼ ਆ ਜਿਹੜਾ ਜਦੋਂ ਕਿਤੇ ਨਾ ਕਿਤੇ ਦੇ ਦਗਾ ਫੇਰਿਆ ਹੋਇਆ ਬਹੁਤ ਦੂਰ ਤੱਕ ਪ੍ਰਕਾਸ਼ ਜਾਂਦਾ ਪਰ ਅੱਗੇ ਨਹੀਂ ਪ੍ਰਕਾਸ਼ ਪ੍ਰਕਾਸ਼ ਦੀ ਪ੍ਰਕਾਸ਼ ਦੀ ਹੱਦ ਦੀ ਪ੍ਰਕਾਸ਼ ਦੀ ਹੱਦ ਹੈ प्रगाद की शक्ति की हद प्रगाद की शक्ति की विकास की हद है विकास की हद है विकास की हद है माया के अंदर और बाहर दो जगह सरकार माया के अंदर और बाहर दो जगह बाहर भी प्रकाश है भीतर भी प्रकाश है कोई होगा ਉਸੇ ਸੰਤ ਦੇ ਅੰਦਰ ਹੋਏ ਗਿਆਨ ਪ੍ਰਕਾਸ਼ ਦਾ ਨਹੀਂ ਬਣਾਉਂਦਾ ਮਰਦਾ ਉਹ ਸੰਤ ਹੋਈ ਉਸ ਸੰਤ ਦਾ ਨਹੀਂ ਬਣਾਉਂਦਾ ਜੀ ਦਾ ਹੀ ਤੇ ਬਣਾਉਂਦਾ ਫਿਰ ਹੋਣੀ ਫਿਰ ਦੀ ਹੋਣੀ ਬੋਜੋ ਜੀਵਾ ਬੋਜੋ ਤਾਂ ਹੀ ਬਣਾਉਂਦਾ ਫਿਰ ਐਨੇ ਸਦੀਵਾ ਬੜੇ ਉਹ ਸੰਤ ਦਾ ਫਿਰ ਨਾਸ ਦੀ ਉਹ ਅਵਨਾਸ਼ੀ ਉਹ ਆਸਾਨ ਕੀਆ ਅਵਨਾਸ਼ੀ ਪ੍ਰਖ ਪਾਇਆ ਬੇਸ਼ੱਕ ਅਵਨਾਸ਼ੀ ਪ੍ਰਖ ਅਵਨਾਸ਼ੀ ਜਿਹੜਾ ਪਾਇਆ ਪਰਮੇਸ਼ਰ ਨੇ ਪਰਮੇਸ਼ਰ ਪਾਇਆ ਸੀ ਪ੍ਰਖ ਨੇ ਹਾਂ ਅਵਨਾਸ਼ੀ ਉਸ ਤਰ੍ਹਾਂ ਕੇ ਨਹੀਂ ਬਣਾਇਆ ਚਾਹਿਆ ਹੋਇਆ ਜਿਹੜਾ ਪ੍ਰਖ ਸੀ ਇਹ ਅਵਨਾਸ਼ੀ ਹੋਇਆ ਉਸ ਅਸਥਾਨ ਦਾ ਨਹੀਂ ਬਰਾਬਰ ਦੇਵਨਾਸ਼ ਹੀ ਹੋ ਗਿਆ ਅਗੇ ਕੀ ਪਾਇਆ ਪਰਮੇਸ਼ਰ ਇਹਨੇ ਪਾਇਆ ਪਰਮੇਸ਼ਰ ਦਾ ਪਾਇਆ ਪਰ ਨਾ ਕਰੇ ਨਾ ਕਰੇ ਗਿਆ ਹੋਰ ਪਕਤੀ ਆ ਜੇ ਸਾਡਾ ਨਾਲ ਕੋਰਟ ਨਹੀਂ ਕਰਦੀ ਤਾਂ ਅਸੀਂ ਨਹੀਂ ਮੰਨ ਸਕਦੇ ਵੀ ਇਹ ਸਹੀ ਕਿ ਬਰਾਬਰ ਖੜੀ ਹੋਵੇ ਦੂਈ ਪੌੜੀ ਉਹ ਕਹੇ ਹਾਂ ਬਿਲਕੁਲ ਇਹੀ ਹੈ ਇਹੋ ਪੌੜੀ ਇਹੀ ਰੰਗ ਠੀਕ ਜਾ ਰਿਹਾ ਕਿੱਥੇ ਜਾ ਰਿਹਾ ਸਾਈਡ ਤੇ ਪੌੜੀਆਂ ਖੜੀਆਂ ਨੇ ਨਾਲ ਬਿਲਕੁਲ ਇਹੀ ਕਹਦੀਆਂ ਜਿਵੇਂ ਮਾਲੁਕਾਂ ਨੂੰ ਨਾਮ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਆ ਦੇਖੋ ਪਾਇਆ ਵਰਨ ਨੁਕੀਰਾ ਆਪਕੇ ਮਕਾਨੋ ਜੀ ਤੇ ਇੱਕ ਰੰਗ ਮਾਟਣਾ ਨਾਮ ਰਤੇ ਨਾਮ ਵਖ ਇੱਕ ਰੰਗ ਨਾਮ ਰਤੇ ਇੱਕ ਰੰਗ ਸਦਾ ਸੱਚ ਨਾ ਸੱਚ ਦਾ ਰੰਗ ਜੜ ਗਿਆ ਸੱਚ ਉਹਦਾ ਇੱਕ ਜਦ ਦੇ ਨਾਲ ਆਇਆ ਝੂਠ ਹੈ ਉਹ ਰੰਗ ਨੇ ਹੋ ਆਪਣੇ ਆਪਣੀ ਮਤਾਂ ਦੀ ਸਦਾ ਸਦਾ ਬਸੇ ਪਾਰ ਕੇ ਉਹ ਪਰਮੰਤ ਸਰਬਾਲਤ ਹੈ ਇਨਾਨ ਨੂੰ ਸੱਚ ਨਾਲ ਜੜ ਗਿਆ ਸੱਚ ਪਰਖ ਹੋਗੇ ਨਾ ਜਿਉਂ ਜਲ ਦੇ ਵਿੱਚ ਜਲ ਖਟਾਨਾ ਜਿਹਦੇ ਵਿੱਚ ਆਗੇ ਪਿਆ ਉਹਨੇ ਖਟ ਲਿਆ ਜਿਹੜਾ ਆਇਆ ਹੈ ਖਟੇ ਹੋਗੀ ਨਾ ਜਲ ਜਲ ਆਏ ਖਟਾਨਾ ਜਿਹੜਾ ਉਹਨੇ ਖਟਿਆ ਜਿਹੜੇ ਜਲ ਚ ਆਇਆ ਜਲ ਹੋਰ ਉਹਨੇ ਖੱਟੇ ਨਹੀਂ ਖੱਟੇ ਜਿਹਦੇ ਵਿਚਾਇਉ ਨਹੀਂ ਖੱਟੇ ਉਹਨੇ ਵਧਾਇਆ ਜਿਦਾਲਤ ਹੀ ਖੋਲ ਕੇ 100 ਰੁਪਿਆ ਚਲੇਗਾ ਖੱਟੇ ਵਾਹ ਵਾਹ ਅੱਗੇ ਬੋਲ ਦੇ ਬੋਲ ਸਿੱਧਾ ਇਹ ਆਹ ਖਾਲ ਚਲੋ ਹਰ ਹਰ ਹਰ ਤੁਹਾਨੂੰ ਸਬੋਧਨਾ ਦੇ ਅੱਲਾਹ ਕੱਢ ਆ ਜਿਹੜਾ ਮਾਨਾ ਨਾ ਜਦੋਂ ਇਹਨੂੰ ਸੇਲਾ ਹੋ ਜਾ ਬਦਨ ਜਲ ਮੇ ਜਲ ਆਏ ਘਟਾਨਾ ਤੇ ਉਹ ਜੋਤੀ ਆਰਸੀ ਹਰ ਦੇ ਰਸਨਾ ਕਹਾਂ ਦਾ ਕੇ ਇਮਾਨੇ ਜੋ ਜਲ ਮੈਂ ਜਾ ਲਾਏ ਖਟਨਾ ਕਿਉਂ ਜੋਤੀ ਸੰਜੇ ਜੇ ਮੈਂ ਕੋਈ ਜਲ ਪੈਣਾ ਹੈਗਾ ਕੋਈ ਜਲ ਹੋ ਉਹ ਜਲ ਭੋਤਾ ਹੋ ਗਿਆ ਤੇ ਖਟ ਗਿਆ ਉਹ ਹੋ ਗਿਆ ਜੋਤੀ ਸੰਜੇ ਜੋ ਸਮਾਨੇ ਇਹ ਮੈਂ ਜਿਹੜੀ ਮਨ ਚਲੋ ਆਪਣੇ ਮੂਲ ਜੋਤੀ ਐ ਸਮਾਉਂਦਾ ਛੱਡਿਆ ਨਹੀਂ कट ही हो गई दो एक हो गए डबल टांग हो गए शिकार क्रिया रहा हो गए मिट्टी गगन पाए पे नानक नानक के सड करवा मिट्टी गगन पाए पे श्रीराम आजला जाना सी खत्म हो गया विश्राम हो गया बात छुट्टी है होना है मुकया देख गया ਪਾਇੇ ਵਿਸ਼ਵਨਾਥ ਕੇ ਪਰਮ ਕੇ ਸਰਦਾਰ ਪ੍ਰਭ ਕੇ ਸਤਿਪੁਰਮ ਸਦਾ ਬਾਤ ਹੈ ਪ੍ਰਭ ਤੇ ਕਰਵਾਣਾ